ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈ ਸਹਿਜ ਸੁਭਾਈ ਮੇਗ ਵਰਸੈ ਦਇਆ ਕਰ ਗੂੜੀ ਸ਼ਹਿਬਰ ਲਾਏ ਬਾਬੀ ਹੈ ਹੁਕਮ ਪਛਾਣਿਆ ਜਦੋਂ ਬਾਬੀ ਹੈ ਨੇ ਹੁਕਮ ਪਛਾਣ ਲਿਆ ਗੁਰ ਕੈ ਸਹਿਜ ਸੁਭਾਏ ਜਦ ਸਤਗੁਰ ਦਾ ਉਹਦੇ ਮੰਗੋ ਉਹਦੇ ਅਵਸਥਾ ਪ੍ਰਾਪਤ ਹੋਗੀ ਉਹ ਹੈ ਸਹਿਜ ਮੜ ਗਿਆ ਉਹ ਜੀ ਭਾਵਨਾ ਉਸੇ ਸਤਗੁਰ ਪਰ ਕੀ ਪੈਦਾ ਹੋ ਗਈ ਅੰਦਰ ਸਤਗੁਰ ਪਰ ਦਾ ਇਤਿਹਾਸ ਹੈ ਸਤਗੁਰ ਪਰ ਤੇ ਆ ਕਰਨ ਕੂੜੀ ਸ਼ਬਦ ਲਾਏ ਫਿਰ ਕੀ ਸੀ ਫਿਰ ਵਰਸਿਆ ਅੰਦਰ ਫਿਰ ਸ਼ਬਦ ਗੁਰੂ ਪ੍ਰਗਟ ਹੋਇਆ ਜੇਗ ਵਰਸਾ ਤੇ ਆ ਕਰ ਦਿਆ ਦਿੱਤੀ ਪਰਮੇਸ਼ਰ ਨੇ ਕੂੜੀ ਸ਼ਬਦ ਫਿਰ ਤੇ ਸ਼ਬਦ ਨਾਲ ਕੀ ਜੂੜ ਸੀ ਸਾਲ ਗੂੜ ਗਿਆ ਨ ਸਮਝ ਆ ਗਿਆ ਗਿਆਨ ਦੀ ਗੂੜ ਤਾਂ ਸਭ ਸਮਝ ਆ ਗਈ ਹਾਂ ਜੀ ਬਾ ਮੀ ਹੈ ਕੂਕ ਪੁਕਾਰ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਲਾਹੀ ਜੇ ਦਿਨ ਦਾ ਸਬਨਾ ਜੀਆਂ ਰਿਜਕ ਸਮਾਈ ਹਾਂ ਵੀ ਕੂਕ ਪੁਕਾਰ ਤੇ ਜਿਹੜੀ ਸਾਰੀ ਬੰਦ ਸੀ ਆ ਯਾਰ ਕੁਝ ਵੀ ਬੰਦ ਸੀ ਜੜੀ ਦੌਪਦੀ ਬੰਦ ਸੀ ਉਹ ਵੀ ਲੋੜ ਨਹੀਂ ਰਹੀ ਆ ਮਿਲ ਗਿਆ ਸਭ ਕੁਝ ਸਭੇ ਛਾਪੂਰੀਆਂ ਹੋ ਗਈਆਂ ਜਪਾਇਆ ਅਗਮਾ ਪਾਰਾ ਜਾਗਮਾ ਪਾਰਾ ਪਾਲਿਆ ਨਾਮ ਲੜ ਗਿਆ ਸਾਰੀਆਂ ਛਾਪੂਰੀਆਂ ਹੋ ਗਈਆਂ ਕੋਈ ਕੂਕ ਪੁਕਾਰ ਰਹਿ ਨਹੀਂ ਗਈ ਕੂਕ ਪੁਕਾਰ ਬਚੀ ਹੋਈ ਨਹੀਂ ਕੋਕ ਪਾਰ ਰਹਿ ਗਈ ਸੁਖਮੈ ਆ ਕੇ ਨਾਲ ਲਾਈਏ ਜੇ ਦਿਲ ਦਾ ਸਭਨਾ ਜੀਵ ਰੇ ਸਭ ਆਏ ਨਾਨਕਾ ਨਾ ਉਹਦੀ ਬੜਾਈ ਕਰੀਏ ਉਹਦੀ ਸਿਫਤ ਸਲਾਹ ਕਰੀਏ ਜਿਹੜੇ ਸਾਰੇ ਜੀਵ ਨੂੰ ਵਿਦਕ ਦਾ ਅਰਥਾਲੇ ਜੀਓ ਦੇ ਵਿੱਚ ਸਮਾਇਆ ਹੋਇਆ। ਖੜੀ। ਮਹੱਲਾ ਤਿਜਾ। ਛਾਤ੍ਰਿਕ ਤੂੰ ਨਾ ਜਾਣਹੀ। ਕਿਆ ਤੁਦ ਵਿੱਚ ਤਿਖਾ ਹੈ। ਕਿਥ ਪੀਤਾ ਤਿਖ ਜਾਏ। ਦੂਜੇ ਭਾਇ ਭ੍ਰਮਿਆ। ਅੰਮ੍ਰਿਤ ਜਲ ਪੱਲੇ ਨਾ ਪਾਈ। ਓ ਛਾਤ੍ਰਿਕ ਉਹਨੂੰ ਦਬੀਰ ਨੂੰ ਸ਼ਾਤਰ ਕਸਲਤਾਂ ਗਾਣੇ ਆਪਣੇ ਆਪ ਨੂੰ ਚਤੁਰ ਸਭੀ ਦੈ ਤੇ ਤਰਾਹੀ ਸ਼ਰਦਾ ਜੀ ਸ਼ਾਤਰ ਕਤੂ ਨਾ ਜਾਣ ਹੀ ਕਿਆ ਤੁਦ ਵਿੱਚ ਤਿਖਾ ਕਿਦ ਪੀਤੇ ਸਿਖ ਜਾਏ ਜਦਰ ਸਾਧੂ ਬਹੁਤ ਬਣਦਣ ਅਕਲ ਵਾਲਾ ਤਾਂ ਬਹੁਤ ਬਣਦਾ ਪਰ ਤੈਨੂੰ ਇਹ ਵੀ ਪਤਾ ਜਿਹੜੀ ਤੇਰੀ ਤਿਖਾ ਹੈ ਕਿ ਕਿਹੜੀ ਕੀ ਹਿੱਦਤ ਪ੍ਰੇਡ ਨਾਲ ਦੂਰ ਹੋਗੀ ਕਿਦ ਪੀਤੇ ਸਿਖ ਜਾਏ ਕਿਆ ਤੁਦ ਹੈ ਤੇਰੇ ਵਿੱਚ ਟੇਖਾ ਕੀ ਹੈ ਤੇਖਾ ਦਾ ਰੂਪ ਕੀ ਹੈ ਕਾਜੀ ਤੇਖਾ ਕਿਹੜੀ ਚੀਜ਼ ਦੇ ਪੀਤੇ ਚ ਤੱਕ ਜਾਣੀ ਹੈ ਤੇ ਸ਼ਰ ਨਾ ਟੇਰੇ ਅੰਦਰ ਬਾਹਰ ਦੀ ਜਿਹੜੀ ਤੇਰੀ ਕਿਰਨ ਤੈਨੂੰ ਪਤਾ ਨਹੀਂ ਬਣਾ ਰਿਹਾ ਤੂੰ ਚਾਦਰ ਕਰ ਦੂਜੇ ਭਾਇ ਭ੍ਰਮਿਆਂ ਅੰਮ੍ਰਿਤ ਜਲ ਪੱਲਾ ਨਾ ਪਾਏ ਦੂਜੇ ਭਾਇ ਤਰਬਿਆ ਤੂੰ ਦੂਜੇ ਭਾਇ ਲੱਗਿਆ ਹੋਇਆ ਹੈ ਨਾ ਨੂੰ ਛੱਡ ਕੇ ਔਰ ਮਾਇਆ ਦੇ ਦਿੱਤੀਆਂ ਸਿੱਧੀਆਂ ਮਗਰ ਲੱਗਿਆ ਹੋਇਆ ਧਰਮ ਨੂੰ ਧੰਦਾ ਬਣਾਇਆ ਹੋਇਆ ਤਾਂ ਅਬਰ ਜਲ ਪੱਲੇ ਨਾ ਪਾਏ ਅਬਰ ਜਲ ਤੇ ਪੱਲੇ ਕਿਵੇਂ ਪੈ ਜੂ। ਤੂੰ ਦਫਰ ਬਿਚਿਆ ਪਰ ਬਿਹਾ ਹੋਇਆ ਪਰ ਤੇ ਨਾਲ ਕੋ ਗਿਜਾਣਾ। ਸੱਚ ਤੋਂ ਕੋ ਭੁਖੇ ਢੂਠ ਵੱਲ ਨੂੰ ਉਹ ਕਰ ਲਿਆ। ਅੰਦਰੋਂ ਬਾਹਰ ਨੂੰ ਬਾਹਰਲੇ ਸ਼ਰੀਰ ਨਾਲ ਜੁੜ ਗਿਆ। ਉੱਤਰੋਂ ਉੱਤਰ ਮੁਖੀ ਤੇ ਬਾਹਰ ਮੁਖੀ ਹੋ ਗਿਆ। ਇਸ ਕਰਕੇ ਤੇਰੇ ਬੰਲੇ ਦੋਹਾਂ ਕੋ ਨਦਰ ਕਰੇ ਜੇ ਆਪਣੀ ਤਾਂ ਸਤਗੁਰ ਸੁਬਾਹ ਨਾਨਕ ਸਤਗੁਰ ਤੇ ਅੰਮ੍ਰਿਤ ਜਲ ਪਾਇਆ ਸਹਜੇ ਰਇਆ ਸਮਾਇ ਸਤਨਾ ਕਰੇ ਜੇ ਆਪਣੀ ਤੇ ਆਪਣੀ ਮੇਰ ਕਰਦੇ ਵੇ ਪ੍ਰਭੂ ਸੁਭਾਏ ਤਾਂ ਕੋਈ ਸਤਗੁਰ ਨੂੰ ਮੇਲ ਹੋ ਜੀਵੇ ਨਾਨਕ ਸਤਗੁਰ ਤੇ ਅਗਰ ਜਲ ਪਾਇਆ ਸਹਜੇ ਰਇਆ ਸਮਾਇ ਉਹ ਸਤਗੁਰ ਤੋਂ ਅੰਮ੍ਰਿਤ ਜਲ ਅੰਮ੍ਰਿਤ ਉਹ ਮਿਲ ਸਕਦਾ ਗਿਆਨ ਅੰਮ੍ਰਿਤ ਮਿਲ ਸਕਦਾ ਸੱਚ ਦਾ ਗਿਆਨ ਵੀ ਅੰਮ੍ਰਿਤ ਅੱਜ ਵਾਰੇ ਜਾਣਕਾਰੀ ਜਿਹੜੀ ਹੈ ਇਹੀ ਅਮਰ ਜਲ ਹੈ। ਸੱਚ ਹੈ ਇਹ ਸੁਣ। ਵੇਖ ਸਕਦੇ ਆ ਪਰ ਜੇ ਤੇਰੇ ਅੰਦਰ ਸੁਪਾਏ ਹੋਵੇ। ਭਾਵਨਾ ਤੇਰੀ ਖੋਵੇ ਤੇਰੇ ਅੰਦਰ ਕੋ ਖੋਵੇ ਤਾਂ ਮਿਲ ਜੂ। ਕੋਈ ਜੇ ਬਗਿਆ ਤਾਂ ਲੈਣਾ ਨਹੀਂ ਜੇ ਭੁੱਖ ਨਾ ਹੋ ਤਾਂ ਲੈਣਾ ਨਹੀਂ। ਲੈnde ਜਿਹੜੀ ਇਹਨਾਂ ਲੋਕ ਤੋਸ ਕਰੇ ਉਹਨਾਂ ਦੇ ਜੋ ਲੋਭ ਨਾਲ ਲੈਣਾ। ਲੋਭ ਨਹੀਂ ਲੈਉ ਤਸਕਰ ਉਹਦੇ। ਨਹੀਂ ਤਾਂ ਤੇ ਸਰਟੀਫਿਕੇਟ ਵੀ ਜਾਵੇ ਲੈਦੇ ਨਹੀਂ ਉਹ। ਹੋਜੀ। ਇਤੋਂ ਇੱਕ ਗੱਲ ਹੋਰ ਸਾਫ਼ ਹੋ ਗਈ ਕਿ ਜਿਹੜੇ ਅੰਮ੍ਰਿਤ ਜਲ ਦੀ ਗੱਲ ਹੋ ਰਹੀ ਹੈ ਇਹ ਸਤਿਗੁਰ ਜੋ ਆਪਣੇ ਅੰਦਰ ਬੈਠਾ ਉਹ ਤੋਂ ਮਿਲਣਾ ਹੈ ਜੀ ਪੰਜਾਂ ਪਿਆਰਿਆਂ ਤੋਂ ਪਹੌਲ ਮਿਲਦੀ ਹੈ ਜੀ ਉਹਦਾ ਪਹੌਲ ਹੈ ਉਹ ਤਾਂ ਇੱਧਰ ਲਾਉਣ ਵਾਸਤੇ ਆ ਵੀ ਭਾਈ ਇੱਧਰ ਇੱਧਰ ਨੂੰ ਲੱਗ ਜਾ ਅੰਮ੍ਰਿਤ ਕਹਿਣ ਲੱਗ ਗਏ ਫਿਰ ਆਹ ਪੰਕਤੀ ਜਿਹੜੀ ਹੈ ਇਹ ਤਾਂ ਹੋਰ ਸੰਦੇਸ਼ ਦੇ ਰਹੀ ਹੈ ਜੀ ਉਮਰ ਤਾਂ ਘੱਟਾਂ ਦੀ ਚਾਹੀਦਾ ਸੀ ਉਹਦੇ ਹਿਸਾਬ ਨਾਲ 36 ਅਮਰਤ ਹੋਰ ਵੀ ਨੇ ਫਿਰ ਸਰੀਰ ਦੇ ਖਾਲੀ ਵਾਲੇ ਤੇ ਪ੍ਰਸ਼ਾ 36 ਅਮਰਤ ਖਾਂ ਵਿੱਚ ਫਿਰ ਤਾਂ ਉਮਰ ਨੰਬਰ ਇੱਕੇ ਰਹਿਣੀ ਉਹ ਜੇ ਹੋਰ ਵੀ ਹੈਗੇ ਤੇ ਹੈਲੋ ਸਰੀਰ ਦੇ ਖਾਲੀ ਵਾਲੇ ਸਰੀਰ ਦੇ ਪੀੜੀ ਵਾਲੇ ਠੀਕ ਗੱਲ ਹੈ ਚੇਤਰ ਬਣਦੇ ਤੇ ਯਾਤਰਕ ਨੇ ਬਹੁਤੇ ਸਿਆਣੇ ਬਣਦੇ ਤੇ ਇਹੀ ਦਾ ਚਾਤ ਇਹਨਾਂ ਨੂੰ ਦਾ ਚਾਤ ਰੱਖਿਆ ਹੈ ਚਾਤਰ ਕੋਰ ਕਿਹਨੂ ਕੇ ਹੈ ਕਿ ਬਹੁਤੇ ਸਿਆਣੇ ਸੀ ਜਿਹੜੇ ਉਹਨਾਂ ਨੇ ਕੀਤਾ ਇਹ ਕੰਮ ਹਾਂਜੀ ਔੜੀ ਇੱਕ ਵਣਖੰਡ ਬੈਸੇ ਜਾਏ ਸਦ ਨਾ ਦੇ ਇੱਕ ਪਾਲਾ ਕੰਕਰ ਭੰਨ ਸੀਤਲ ਜਲ ਹੀ ਵਹੀ ਪੁਜਾਇਆ ਜੇ ਲੋਕ ਨੇ ਜਿਹੜੇ ਵਣਖੰਡ ਬਾਹਰ ਜੰਗਲਾਂ ਜਾ ਕੇ ਬਹਿ ਜਾਂਦੇ ਨੇ ਐਸਾ ਜਾਏ ਉਹ ਬੈਠੇ ਰਹੋ ਸਦ ਕੋ ਉਹ ਨਹੀਂ ਦਿੰਦਾ ਸਾਨੂੰ ਗਰੋਤ ਪਾਛੇ ਨੂੰ ਉਹਨੂੰ ਬੁਲਾ ਕੇ ਦਊਂ ਕਿਆ ਜੋ ਤੁੰਗ ਡੋਬ ਨੋ ਸਾਧਕੇ ਉਹਨਾਂ ਨੂੰ ਨਹੀਂ ਦੰਦਾ ਬੈਠੇ ਨੇ ਬੈਠੇ ਨੇ ਕਿਹਾ ਕਿ ਨਾ ਕੇ ਨਹੀਂ ਦਦੋ ਇੱਕ ਪਾਲਾ ਕੱਤਰ ਭੰਦ ਚੀਤਲ ਚਲ ਜੇ ਵੀ ਇੱਕ ਆ ਜਿਹੜਾ ਪਾਲਾ ਹੁੰਦਾ ਕੱਤਰ ਜਦਿ ਬਰਸ ਪੈਂਦੀ ਹੈ ਪੂਰਾ ਪੈਂਦਾ ਜਲੂ ਪੱਢ ਕੇ ਕੀਸੇ ਚਲਦੇ ਦੇ ਬੈਠੇ ਜਲਤਾ ਰਹੇ ਕਰਦੇ ਨੇ ਹੋਜੀ ਬਰੇਹੀ ਨੂੰ ਦੁੱਖ ਦੇ ਰਹੇ ਹਾਂ ਜੀ ਨਾ ਤੋ ਵਹੀ ਇੱਕ ਜਟਾ ਵਿਕਟ ਬਿਕਰਾਲ ਕੁੱਲ ਘਰ ਖੋਵਈ ਆਹ ਕੁਝ ਹੈ ਜਿਹੜੇ ਆਂ ਉਹਦਾ ਨੇ ਉੱਤੇ ਪਾਸਮ ਮੋਲਦੇ ਨੇ ਮੈਂ ਖੰਡ ਕਦੇ ਨਾ ਹੁੰਦੇ ਨਹੀਂ ਪਾਣੀ ਨਾਲ ਹੀ ਹੁੰਦੇ ਬੱਸ ਉਹ ਜਿਹੜਾ ਤੁਸੀਂ ਨਾ ਉਹਦਾ ਸਵਾ ਮਾਰ ਲੈਂਦੇ ਨੇ ਕਹਿੰਦੇ ਥੋੜੀ ਰਾਸ਼ਨ ਨਾਲ ਚੱਲਦੇ ਹਾਂ ਉਹ ਜਿਹੜੀ ਧੋਣੇ ਦੀ ਸੌ ਹੁੰਦੀ ਉਹ ਹੀ ਮਾਰ ਕੇ ਬੱਦ ਉਹ ਜਟਾ ਬਿੱਕਤ ਖੋ ਗਈ ਜਟਾਵਾਂ ਨੇ ਬਿਕਰਾਲ ਉਹਨਾਂ ਅੱਜ ਵੀ ਸਵਾ ਬੋਲਦੇ ਨੇ ਪੁੱਲ ਘਰ ਖੋ ਗਈ ਆਪਣੇ ਪੁੱਲ ਘਰ ਦੋ ਹਨ ਖੋਲੇ ਦਿੱਤੇ ਘਰ ਦਾ ਪਤਾ ਨਹੀਂ ਲੱਗਦਾ ساری ਜ਼ਿੰਦਗੀ ਉਹਨਾਂ ਨੂੰ ਕਿੱਥੇ ਚੱਲ ਵੀ ਜਿੱਥੇ ਮਰਜੀ ਕਿੰਨੇਜ ਘਰ ਕੀ ਹੈ ਉਹਨਾਂ ਦਾ ਖੋ ਗਿਆ। ਕੁਲ ਵੀ ਖੋ ਗਈ। ਉਹਨਾਂ ਨੂੰ ਪਤਾ ਨਹੀਂ ਨਰਾਕਾਰੀ ਕੁਲ ਕੀ ਹੈ ਸਾਡੀ। ਜੇ ਬਲਕੋਲ ਪੀਹ ਹੈ ਕੋਲ ਨੂੰ ਕੋਲ ਬੰਦ ਹੈ। ਠੀਕ ਹੈ। ਪਤਾ ਹੈ। ਹਾਂਜੀ। ਇੱਕ ਦਿਨ ਰਾਤ ਨੀਂਦ ਨਾ ਸੋਵਹੀ। ਇੱਕ ਅਗਨ ਜਲਾਵੈ ਅੰਗ ਆਪ ਵਿਗੋਵਹੀ। ਉਹ ਜਹ ਫਿਰ ਲੋਤ ਜਿਹੜਾ ਨਸੋਬਣੀ ਫਿਰ ਸੋਹਣ ਤੇ ਦੀਦੀ ਨੇ ਕਹਿੰਦਾ ਵੀ ਸੋਣਾ ਨਹੀਂ ਹੈਗਾ ਪਤਾ ਨਹੀਂ ਇੱਥੇ ਕੋਈ ਜਾਗਦੇਆਂ ਨੂੰ ਪਰ ਜਾਗਦੇ ਤਾਂ ਬਸ ਇੱਕ ਆਗਨ ਜਲਾਵਾ ਹੰਦ ਨਾਲ ਆਪਣੇ ਅੰਕਾਂ ਨੂੰ ਜਾਲਦੇ ਆਪ ਬੇਗੋਭ ਹੀ ਰਹੇ ਨੇ ਆਪਣਾ ਜਿਹੜਾ ਅੰਗ ਪਰ ਦਾਗੀ ਕਰ ਰਹੇ ਨੇ ਰਿਣ ਨਾਮ ਹੈ ਤਨਚਾਰ ਕਿਆ ਕਹਿ ਦਰੋਵਹੀ ਸੋਹਣ ਖਸਮ ਦਵਾਰ ਜੇ ਸਤਗੁਰ ਸੇਵਹੀ ਉਹ ਬਰਨਾਵੇ ਤਨ ਛਾਰ ਹੈ ਤਾਂ ਜਵਾਹ ਹੈ ਉਹ ਸਰੀਰ ਤੇ ਕਵਰ ਚ ਦਪਤਾ ਤਾਂ ਵੀ ਇਹਦੀ ਸੌ ਵੜ ਜਾਣੀ ਤੇ ਬਿਰਦੇ ਛਾਰ ਹੈ ਉਹ ਇਹ ਤੇ ਕੀ ਫਾਇਦਾ ਇਹ ਤੇ ਸੌ ਦੇ ਸੌ ਬਣ ਦਾ ਕੀ ਫਾਇਦਾ ਬਰਨਾਵੇ ਤਨ ਛਾਰ ਕਿਆ ਕਹਿ ਰੋ ਵੀ ਇਹਨੂੰ ਕਿਆ ਕਹਿ ਕੇ ਰੋਈਏ ਸਰੀਰ ਨੂੰ ਕੀ ਕਹਿ ਕੇ ਰੋਈਏ ਸਰੀਰ ਨੂੰ ਇਹ ਤਾਂ ਪਹਿਲੇ ਹੀ ਛਾਰ ਹੈ ਸੌ ਦੇ ਨਖਸਮ ਦੁਆਰ ਜੇ ਸਤਗੁਰ ਤੇਹੀ ਉਹ ਜਿਹੜੇ ਸਤਗੁਰੂ ਦੀ ਸੇਵਾ ਕਰਦੇ ਨੇ ਉਹੀ ਦਵਾਰੇ ਤੇ ਜਾ ਕੇ ਖੁੰਦੇ ਨੇ ਖਸਮ ਦੇ ਦਵਾਰੇ ਤੇ ਉਹੀ ਜਾ ਕੇ ਖੁੰਦੇ ਨੇ ਉਹੀ ਅਪੜਦੇ ਨੇ ਜਿਹੜੇ ਉਹਦੀ ਆਗਿਆ ਚ ਰਹਿੰਦੇ ਨੇ ਬਾਹਰਲੇ ਤਨ ਨਾਲ ਕੋਈ ਭਗਤੀ ਜਿਹੜੀ ਕੀਤੀ ਹੈ ਗੁਰਮਤਿ ਚ ਪ੍ਰਵਾਨ ਨਹੀਂ ਹੈ ਜੀ ਬਾਣੇ ਭਗਤੀ ਕਰਨ ਵਾਸਤੇ ਵੀਰ ਮਿਲਿਆ ਸੀ ਇਹਦੀ ਥੋੜੀ ਭਗਤੀ ਕਰ ਲਈਏ ਇਹ ਤਾਂ ਇੱਕ ਗਹਿਰੀਆ ਖੁਰਪੇ ਨੂੰ ਬਾਹਾਂ ਲੱਗਿਆ ਹੁੰਦਾ ਲੱਕੜ ਦਾ ਪਿੱਛੇ ਉਹ ਠੀਕ ਆ ਬਾਹਰ ਵੀ ਕੰਮ ਹੈ ਪਰ ਬਾਹਰ ਹੁਣ ਦੇ ਲਈ ਆ ਇਹ ਬਾਹਰ ਘੁਰਪੇ ਤੋਂ ਕੰਮ ਲਈ ਇਹ ਕਮ ਤਾਂ ਹੋ ਰਿਹਾ ਖੁੱਲਪੇ ਕਰਨਾ ਇਹ ਤਾਂ ਬਾਹਰ ਹੀ ਆਂ ਕੋੜਾ ਛੋਰਾ ਮੁੱਠਾ ਮਰਦਾਰ ਹੀ ਆ ਉਹ ਕੋੜ ਦੇ ਜਿਹੜੇ ਨੂੰ ਪਿੱਛੇ ਕਰਕੇ ਮੈਨੂੰ ਸੱਜ ਦਾ ਛੋਰਾ ਲਾਉਣਾ ਦਾ ਸੱਚ ਕੀ ਕਰਤੀ ਬਣਾਉਣਾ ਸੀ ਮੁੱਠਾ ਤਾਂ ਠੀਕ ਆ ਮੁੱਠਾ ਦੀ ਬਦਲ ਸਰੀਰ ਮੁੱਠਾ ਦੀ ਬਦਲੀ ਰਹੇ ਹਾਂ ਹਰ ਚਿਕੀ ਕਰ ਲੋ ਕੋੜ ਦਾ ਛੋਰਾ ਪਿੱਛੇ ਹਟਾ ਦੋ ਬੁੱਢੂ ਪਿੱਛੇ ਹਟਾ ਦੋ ਠੀਕ ਹੈ ਜੀ ਇਹ ਤਾਂ ਜਿਹੜੇ ਰਾਤ ਨੂੰ ਸੌਣ ਵਾਲੇ ਕੁਝ ਫੇਰ ਉਧਰ ਨੂੰ ਇਸ਼ਾਰਾ ਫੇਰ ਹੈ ਕਿ ਜਿਹੜੇ ਰਾਤ ਨੂੰ ਕਹਿੰਦੇ ਸਾਰੀ ਰਾਤ ਜਾਗਾਂਗੇ ਸ਼ਬਦ ਕੀਰਤਨ ਕਰਾਂਗੇ ਉਹਨਾਂ ਦੇ ਵੀ ਪੱਲੇ ਨਹੀਂ ਗੱਲ ਪੈਣੀ ਹੈ ਹੁੰਦਾ ਸੀ ਸਭ ਕੁਝ ਜਿਹੜਾ ਇਹ ਗੱਲ ਲੱਗੇ ਨਹੀਂ ਦਾਸ ਭਾਈ ਇਹ ਤਾਂ ਪਿੱਛੇ ਵੀ ਹੋ ਰਿਆ ਸੀ ਉਹ ਤਾਂ ਗੁਰਬਾਣੀ ਲਿਖੀ ਹੋਈ ਹੈ ਉਹਨਾਂ ਨੂੰ ਕੋਈ ਪਰਵਾਹੀ ਪੁਰਾਣੇ ਐ ਜੀ ਲੋਕੜਾ ਪੜਦੇ ਨੇ ਇਹ ਲੋਕ ਪੜਦੇ ਸੀ ਗੁਰਬਾਣੀ ਆਮ ਲੋਕ ਅਣ ਪੜ ਪੜਦੇ ਸੀ ਜੀ ਨੂੰ ਪਤਾ ਹੈਗਾ ਨੂੰ ਪੜਨਾ ਨਹੀਂ ਰਿਹਾ ਬੁੱਧ ਲਗਣੀ ਨਹੀਂ ਰਿਹਾ ਇਹ ਕਮਲਾ ਕਮਾ ਕੇ ਪੜ ਗਏ ਕੋ ਰਾਜ ਬਦਲ ਗਏ ਇੱਥੇ ਅੰਗਰੇਜ਼ਾਂ ਦਾ ਰਾਜ ਮੁਸਲਮਾਨਾਂ ਦਾ ਝੂਠ ਆਪਣਾ ਪ੍ਰਚਾਰ ਕੀਤਾ ਇਹਨਾਂ ਨੂੰ ਕੋਈ ਕਹਿੰਦਾ ਸੀ ਵੀ ਤੂੰ ਝੂਠ ਬੋਲਦੇ ਹੁਣ ਹਰੇ ਫੜ ਲੰਦਾ ਝੂਠ ਹੈਗਾ ਠੀਕ ਹੈ ਜੀ ਬਿਨ ਕਿਆ ਕਹਿ ਰੋਹੀ ਸੋ ਹਰ ਨ ਕਿਸਮ ਦੁਆਰ ਜਿਸ ਸਤਿਗੁਰ ਸੇਵਹੀ ਇੱਥੇ 15ਵੇਂ ਪੌੜੀ ਤੋਂ ਆਉਂਦੀ ਹੈ ਜੀ ਹਾਂ ਜੀ ਹਾਂ